माया मनहु ना विसरै मांगै दम्मा दम् सो प्रभ चित्त ना नानक नहीं करम माया मनारा विसरै माया है किसे घड़ी भी संसारी लोग ने मानो नहीं विसरदी और पैसा ही पैसा थारे मांगदे ने माया ही माया कर ने सारा दिन माया ही मांगदे ने बुंदे दम्मा दम् दम् माया और माया ਉੰਕਤ ਹੈ ਹਰ ਪ੍ਰਭ ਚੇਤਨਾ ਆਵੇ ਆਪਣਾ ਹਰ ਪ੍ਰਭ ਦਾ ਜਿਹੜਾ ਮੂਲ ਆ ਉਹ ਤਾਂ ਕਦੇ ਚੇਤਾ ਨਹੀਂ ਹੁੰਦਾ ਸਦਾ ਨਾਨਕ ਨਹੀਂ ਕਰਮ ਇਹ ਕਰਮ ਨਹੀਂ ਹੈਗਾ ਕਰਮ ਦੋ ਨੇ ਸਾਡੇ ਕਹਿੰਦੇ ਦੁੱਖ ਰਿਤ ਸੁਖ ਰਿਤ ਕਰਮ ਰੀ ਇੱਕ ਦੁੱਖ ਹੈ ਸਾਡੀ ਕੋਰਾ ਕੰਮ ਇੱਕ ਸੁਖ ਹੈ ਦੁੱਖ ਰਿਤ ਹਰ ਪ੍ਰਭ ਚੇਤਨਾ ਹਰ ਪ੍ਰਭ ਨਾਲ ਚੇਤਾ ਰਹਿਣਾ ਜੋੜ ਕੇ ਰੱਖਣੀ ਧਿਆਨ ਹਰ ਪ੍ਰਭ ਚ ਰਹਿਣਾ ਇੱਕ ਕਮ ਆਇਆ ਛੰ ਰਹਿਣਾ ਮਾਇਆ ਜਿਹੜਾ ਅੰਡੜਾ ਇਹ ਕਰ ਠੀਕ ਨਹੀਂ ਹੈ ਦੁੱਖ ਨਹੀਂ ਧੀ ਹੈ ਕਿੰਨਾ ਕਮ ਨਹੀਂ ਹੈਗਾ ਇਹ ਨਾ ਹੀ ਕਰਬ ਕੰਮ ਕਰ ਨਹੀਂ ਇਹਦਾ ਰਿਜ਼ਲਟ ਕਹਿੰਦਾ ਨਹੀਂ ਹੈ ਇਹਦੇ ਚ ਲੱਭਣ ਨੂੰ ਕੁਝ ਨਹੀਂ ਹੈ ਅੱਛਾ ਜੀ ਦੇ ਅਰਥ ਆਪਾਂ ਕੀ ਕਰਾਂਗੇ ਕਰਮ ਕਰਾਂਗੇ ਬਖਸ਼ਿਸ਼ ਕਰਾਂਗੇ ਦੇਖੋ ਸੋਚਣਾ ਬੰਕਣਾ ਕਰਵਾਓ ਮਾਇਆ ਅਸੀਂ ਕਰਦੇ ਆ ਗੁਸ਼ ਕਰਦੇ ਆ ਕਬ ਕਬ ਸੋਚਦੇ ਹੈ ਸੋਚਦੇ ਤਾਂ ਹੈਗੇ ਆ ਨਾ ਲੈਣ ਵਾਸਤੇ ਇਹ ਕਰਮ ਇਹ ਦੁਕ੍ਰਿਤ ਕਰਮ ਆ ਸੁਕ੍ਰਿਤ ਨਹੀਂ ਹੈ ਕਰਮ ਇਹ ਕਰਮ ਨਹੀਂ ਬਣਿਆ ਹੈ ਗੁਰਬਾਣੀ ਚੋਂ ਉਹ ਕਿਸਮਤ ਵਾਲੀ ਗੱਲ ਨਹੀਂ ਅਸੀਂ ਕਹਿ ਸਕਦੇ ਇਹ ਦਮ ਕੋਈ ਜੀ ਦੀ ਕਿਸਮਤ ਨਹੀਂ ਫਿਰ ਤਾਂ ਸਾਡੇ ਸਾਡੀ ਗਲਤੀ ਹੋਣਾ ਨਹੀਂ ਫਿਰ ਤਾਂ ਠੀਕ ਆ ਆਪਾਂ ਇਹ ਅਰਥ ਕਰਮ ਦੇ ਲਵਾਂਗੇ ਕਿ ਇਹ ਜਿਹੜਾ ਸੀ ਕਰਮ ਕਰ ਰਹੇ ਆ ਇਹ ਦੇ ਨਾਲ ਪ੍ਰਭ ਚਿਤਨੀ ਆਸਰ ਸਰ ਕੋੜਾ ਮਾਲ ਨਾਲ ਕਰਮ ਕਰਦਾ ਹੈ ਸਰ ਕੋੜਾ ਕਾਜ ਨਾਲ ਹਾਂਜੀ ਇਹ ਸ਼ਲੋਕ ਪਹਿਲਾਂ ਵੀ ਆਇਆ ਜੀ ਆਪਾਂ ਕੀਤਾ ਮਾਰੂ ਕੀ ਵਾਰ ਚ 21 ਨੰਬਰ ਜਿਹੜੀ ਪੌੜੀ ਹੈ ਉਹਦੇ ਚ ਪਹਿਲਾ ਸ਼ਲੋਕ ਹੈ ਇਹ ਥੋੜਾ ਜਿਹਾ ਫਰਕ ਪਾਇਆ ਹੋਇਆ ਮਾਇਆ ਮਨ ਉਹਨਾ ਵਿਸਰੈ ਮੰਗੈ ਦੰਮਾ ਦੰਮ ਇੱਥੇ ਦੰਮਾ ਦੇ ਉੱਪਰ ਬਿੰਦੀ ਨਹੀਂ ਲਾਈ ਹੋਈ ਇੱਥੇ ਇਹਨਾਂ ਨੇ ਪਹਿਲੇ ਸ਼ਲੋਕ 'ਚ ਹੈ ਨਹੀਂ ਪਰ ਜਿਹੜਾ ਹੁਣ ਆਪਾਂ ਕਰ ਰਹੇ 'ਚ ਹੈ ਤੇ ਸੋ ਪ੍ਰਭ ਚਿਤਨਾ ਨਹੀਂ ਕਰਮ ਜਿਹੜਾ ਪਹਿਲਾ ਸ਼ਲੋਕ ਹੈ ਉੱਥੇ ਕਰਮ ਤੇ ਸਿਆਰੀ ਨਹੀਂ ਹੈ ਬਾਇ ਇਨਾ ਫਰਕ ਹੈ ਤਾਂ ਅਰਥ ਆਪਾਂ ਇਹਦੇ ਉੱਥੋਂ ਜੇ ਲਵਾਂਗੇ ਤਾਂ ਵੀ ਕਰਮ ਦੇ ਬਣਨਗੇ ਹਾਂ ਜੀ ਠੀਕ ਹੈ ਜੀ ਇੱਥੇ 19 ਨੰਬਰ ਸ਼ਲੋਕ ਦੀ ਸਮਾਪਤੀ ਹੈ।